श्लोक मोहल्ला तीजा सतगुरु की सेवा सफल है जे को करे चित लाए नाम पदार्थ पाई है अचिंत बसै मन आए ओई तो आयो केड़े कब सतगुरु दी सेवा करना है जे सतगुरु दी सेवा लग जाए सफल कब सबे अच्छा पूरी हो जाने सतगुरु दी सफल है, है। करे जो पदार्थ पाई है ਅਚੰਤ ਵਸੈ ਮਨ ਆਈ ਅਚੰਤ ਵਸੈ ਬੋਲਦਾ 250 ਮਿੰਟ ਜਾਂਦਾ ਅਚੰਤ ਉਹਨੇ ਬੋਲ ਆਏ ਆਇਲ ਉਹਦਾ ਲਫ਼ਜ਼ ਹਾਂਜੀ ਇੱਕ ਖੰਡ ਤੋਂ ਲਫ਼ਜ਼ ਬੋਲੇ ਹੋ ਕਹਿੰਦੇ ਇੱਥੇ ਆ ਕੇ ਬਸ ਜਾਂਦਾ ਸਾਡੇ ਕੋਲ ਅੱਛਾ ਜੀ ਅਚੰਤ ਚਿੰਤਾ ਰਹਿਤ ਹੋ ਕੇ ਸੱਚਖੰਡ ਵਿੱਚ ਵਸ ਜਾਂਦਾ ਉਹ ਉਹਦੇ ਅੰਦਰ ਫਿਰਦਾ ਕਮਣਾ ਹੋਇਆ ਸੇਵਾ ਨਹੀਂ ਕਰਦਾ ਹੋਰ ਹੋਰ ਬਹੁਤ ਕੁਝ ਕਰਦੇ ਨੇ ਲੋਕ ਇੱਥੇ ਕੋ ਕਾ ਸੇਵਾ ਹੈ ਕਰਦਾ ਕੋ ਕੁਛ ਕਰਦਾ ਕੋ ਕੁਛ ਕਰਦਾ ਸਤਗੁਰ ਦੀ ਸੇਵਾ ਕਰੇ ਹਾਂਜੀ ਥੱਲੀ ਸਤਗੁਰ ਦੀ ਸੇਵਾ ਹੀ ਸਫਲ ਹੈ ਜੇ ਦੋ ਹੀ ਲੈਣਾ ਦੇ ਵਿੱਚ ਸਾਰਾ ਕੁਝ ਖੋਲ ਗੋਤੇ ਪਾਣੀ ਚੱਲੇ ਜੋ ਗੁਰਬਾਣੀ ਚੱਲੀ ਹੈ ਦੀ ਸੇਵਾ ਚੱਲਣ ਕਹਿੰਦੀ ਹੈ ਇਹ ਸਤਗੁਰ ਦੀ ਸੇਵਾ ਜਨਮ ਮਰਨ ਦੁੱਖ ਕੱਟੀਏ ਹਉਮੈ ਮਮਤਾ ਜਾਏ ਉੱਤਮ ਪਦਵੀ ਪਾਈਏ ਸੱਚ ਰਹੇ ਸਮਾਈ ਦੇਖ ਲੋ ਜਨਮ ਕਟਿਆ ਗਿਆ ਹਬ ਤੋਂ ਓਕੀ ਗੱਲ ਜਨਮ ਬੜੂ ਤੋਂ ਕਟਿਆ ਲੱਗਿਆ ਜਾਂਦਾ ਜੇ ਜਨਮਨ ਤੋਂ ਹਮੇ ਮਮਤਾ ਜਾਏ ਹੋ ਔਰ ਬਮਤਾ ਤੋਂ ਚਲੀ ਜਾਂਦੀ ਠੀਕ ਹੈ ਜੀ ਹਮੇ ਸੀਗਾ ਆਪਣੀ ਤੇ ਮਮਤਾ ਸੀ ਕਿਸੇ ਦੂਏ ਦਾ ਮੋਹ ਹੈ ਜੀ ਸਰੀਰ ਦਾ ਦੂਏ ਦਾ ਦੂਏ ਸਰੀਰ ਦਾ ਬਾਲ ਲੈਦਾ ਅੱਛਾ ਮਮਤਾ ਹੈ ਬਹੁਤ ਉਚਾਰਤ ਪਿਆਰ ਜ਼ਬਾਨੋ ਜੇ ਬਹਾਲਾ ਜਿਹੜਾ ਇਹ ਮੇਰੇ ਵਾਸਤੇ ਨਾ ਉਪਤਾ ਹੈ ਸਰੀਰ ਦਾ ਅਹਿਸਾਸ ਹੋਣਾ ਆਪਣੇ ਦਾ ਹੈਗਾ ਅੱਛਾ ਜੀ ਆਪਣੇ ਆਪ ਨੂੰ ਪਜਤ ਤਕ ਤੰ ਦੀ ਜੋਬ ਜਿਹੜਾ ਪ੍ਰੇਮ ਆਇਆ ਹੋਇਆ ਹੈ ਇਹ ਉਪਤਾ ਹੈ ਠੀਕ ਹੈ ਆਪਣਾ ਪੜੋ ਹਾਂਜੀ ਉੱਤਮ ਪਦਵੀ ਪਾਈ ਹੈ ਸੱਚੇ ਰਹੇ ਸਮਾਈ ਉੱਤਮ ਪਦਵੀ ਪਾਈ ਹੈ ਉੱਤਮ ਪਦਵੀ ਜਾਂਦੀ ਹੈ ਸੱਚੇ ਰਹਿਣ ਸਮਾਏ ਹਾਂਜੀ ਸੱਚੇ ਹੋ ਕੇ ਚਿੱਤਰ ਮਨ ਸੱਚੇ ਹੋ ਕੇ ਕੁਰੂਵੇ ਨੂੰ ਸਮਾਏ ਰਹਿਣਾ ਨਹੀਂ ਕੁਰੂਵੇ ਹੋ ਕੇ ਰਹਿਣਾ ਸੱਚੇ ਕੋਈ ਚੜਾਲੀ ਤੋਂ ਆਂਕ ਸਭਾਈ ਦਾ ਮਤਲਬ ਕਰੋ ਚੜਾਲੀ ਤੋਂ ਸਾਂਤ ਰਖੀ ਠੀਕ ਹੈ ਨਾਨਕ ਪੂਰਬ ਜਿਨ ਕੋ ਲਿਖਿਆ ਤੈਨ ਸਤਗੁਰ ਮਿਲਿਆ ਆਏ ਐ ਲੈ ਗੜਗੜ ਬਣਾ ਕੇ ਚੱਲੇ ਸੀ ਆਵਸਥਾ ਚੈਦੀ ਹੈ ਜਿਸ ਕੋ ਸਤਗੁਰ ਮਿਲੇ ਹੋਏ ਉਹਨਾਂ ਦੀ ਇੱਛਾ ਪੂਰੀ ਹੋ ਗਈ ਠੀਕ ਹੈ ਜੀ ਮਹੱਲਾ ਤੀਜਾ ਨਾਮ ਰਤਾ ਸਤਗੁਰੂ ਹੈ ਕਾਲ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋ ਉਹ ਆਦੂਆ ਰੰਤ ਚੱਲ ਗਿਆ ਤਾਂ ਸਦਾਈ ਗੁਰੂ ਹੈ ਸਦਾਈ ਗਿਆਨ ਦੇਣ ਵਾਲਾ ਸਦਾਈ ਰੋਸ਼ਨੀ ਦੇਣ ਵਾਲਾ ਖੁਦ ਵੀ ਰੋਸ਼ਨੀ ਦਿੰਦਾ ਇਹਨੂੰ ਨਾਮ ਨਾਲ ਜਾਂਦਾ ਆਪੇ ਸਤਿਗੁਰੂ ਹੈ ਠੀਕ ਫਿਰ ਉਹ ਗੁਰੂ ਨਹੀਂ ਹੋ ਫਿਰ ਉਹ ਰੋਸ਼ਨੀ ਦੇਣ ਲੱਗਾ ਜਦੋਂ ਠੀਕ ਹੈ ਜੀ ਨਾਮ ਰੱਤਾ ਸਤਿਗੁਰੂ ਹੈ ਕਾਲ ਬੋਹਿਤ ਹੋਈ ਕਾਲ ਦੇ ਵਿੱਚ ਬਹੁਤ ਹੁੰਦਾ ਉਹ ਬੋਹਿਤ ਹੈ ਹੈ ਜਾਜ ਕਹਿ ਲੋ ਕੋਲ ਬਿੱਤੀ ਕੋਲ ਬੋਲਦੇ ਸੇ ਸਤਿਬੰਦ ਹਤੇ ਕਹੇ ਕੋਲ ਕਹਿ ਲੋ ਚਾਹ ਜਾਜ ਕਹਿ ਲੋ ਗੱਲ ਕੋਈ ਹੈ ਗੁਰਮੁਖੀ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਗੁਰਮੁਖ ਹੋਵੇ ਕੋਲ ਬਿੱਤੀ ਦੀ ਲੋੜ ਦੀ ਤੁੰ ਦੀ ਲੋੜ ਦੀ ਉਹ ਬੋਹਤ ਭੋਲੇ ਸਮਝੋ ਇਹਨੂੰ ਚਰਨਾਂ ਬੈਠਣ ਵਾਲਿਆਂ ਦੇ ਵਿੱਚ ਚੁਰਤ ਨਾਲ ਚਲਣਾ ਹੈ ਜੀ ਜੀ ਠੀਕ ਹੈ ਗੁਰਮੁਖੀ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋ ਜਿਨ੍ਹਾਂ ਅੰਦਰ ਸੱਚਾ ਸੋ ਹੈ ਜੰਗਲ ਤੋਂ ਪਾਰ ਹੋ ਗਏ ਹੈ ਜੀ ਉਹ ਉਹ ਤਾਂ ਪਾਰ ਹੋ ਗਏ ਉਹਨੂੰ ਭੁੱਖੇ ਸੱਚ ਲਈ ਭੁੱਖੇ ਨਹੀਂ ਕੋਈ ਠੀਕ ਹੈ ਜੀ ਨਾਮ ਸਮਾਲਨੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਉਹ ਕੀ ਕਰਦਾ ਲੋਰ ਇਕੱਠਾ ਕਰ ਲੈ ਨਾਮ ਜਿੱਥੋਂ ਬਣ ਜਾਂਦਾ ਉੱਥੇ ਚੁਗ ਲੈਣਾ ਆਉਂਦੇ ਨਦਰੇ ਨਾਦ ਸਖਾ ਗਾਲਦੇ ਨਾਵੇਂ ਚੁਗਦਾ ਨਾਮ ਦਾ ਚੁਗਾ ਚੁਗਦਾ ਨਾਮ ਇਕੱਠਾ ਕਰਦਾ ਤੇ ਬਾਲੇ ਨਾਮ ਸੰਦਰੇ ਹੈ ਨਾਮ ਨਾਲ ਨਾਮ ਨਿਕਲਿਆ ਉਹਦਾ ਇੱਜ਼ਤ ਹੈ ਜੇ ਨਾਮ ਨਹੀਂ ਨਿਕਲੋ ਬੱਲੇ ਉਂ ਨਾਨਕ ਸਤਗੁਰ ਪਾਇਆ ਕਰਮੀ ਪ੍ਰਾਪਤ ਹੋਏ ਇਹ ਕਹਿੰਦਾ ਜੀ ਉਹਦੇ ਸਤਗੁਰ ਪਾ ਲਿਆ ਹਾਂਜੀ वो कर्म तो कर्म, कर्म है पर प्राप्त भी सद्गुरु तो ही है तो तो है पौड़ी आपे पारस आप है आप की तोन कंचन आपे ठाकुर सेवक आपे आपे ही पाप खंडन ਪਾਰਸ ਵੀ ਆਪ ਹੈ ਆਪ ਮਤਲਬ ਬੱਜਿਆ ਫਿਰਦਾ ਵੀ ਆਪੇ ਹੈ ਪੈਂਦਾ ਆ ਵੀ ਕੋਈ ਅੱਠ ਧਾਤਾਂ ਨੂੰ ਪਾਰਸ ਸੋਨਾ ਬਣਾਉਂਦਾ ਇੱਥੇ ਭੁਲੇਖਾ ਵੀ ਪੈਂਦਾ ਇੱਕ ਵਜੇ ਨੂੰ ਇੱਥੇ ਉੱਗ ਲਗਿਆ ਹਾਂਜੀ ਦੋਹੇ ਦੋਹੇ ਪਾਰਸ ਤੇ ਧਾਤ ਔਕੜ ਹਨ ਰਾਸ ਪ੍ਰਾਪਤ ਆਪ ਕਰਦਾ ਫੱਜ ਜਾਂਦਾ ਵੀ ਆਪ ਮਿਲ ਜਾਂਦਾ ਫਿਰ ਤੁਣਾ ਮੁੱਕ ਜਾਂਦਾ ਤਾਂ ਆਤਮਾ ਦਾ ਆਤਮਾ ਜਲਦੀ ਹੈ ਠੀਕ ਹੈ ਤੋਂ ਪਹਿਲਾਂ ਜਦੋਂ ਮਾਇਆ 'ਚ ਫਸਿਆ ਜਾਂਦਾ ਹੈ ਫਿਰ ਕਦੇ ਫਿਰ ਜਦੋਂ ਗਿਆਨ ਹੋ ਜਾਂਦਾ ਤਾਂ ਪਾਰਸ ਬਣ ਜਾਂਦਾ ਅਗਿਆਨਤਾ ਵਿੱਚ ਇਹ ਧਾਤ ਜਾਂਦਾ ਪਾਰਸ ਕਹਿੰਦੇ ਨੇ ਪਾਰਸ ਬਣ ਜਾਂਦਾ ਹਾਂ ਹਾਂ ਤੇ ਜਦੋਂ ਮਾਇਆ ਤੇ ਸੀਗਾ ਜਦੋਂ ਧਾਤ ਆ ਫਿਰ ਹਾਂ ਜੀ ਹਾਂ ਜਦੋਂ ਮਾਇਆ ਦੇ ਮਗਰ ਭਾਈ ਦਾ ਧਾਤ ਬਣ ਗਿਆ ਠੀਕ ਹੈ ਆਪ ਕਮੀਆਂ ਕਰਕੇ ਧਾਤ ਇਹ ਕਵੀਆਂ ਕਰ ਦਿੱਤੀਆਂ ਪਾਲਸ ਬਣ ਗਿਆ ਰਾਸ ਵੀ ਪ੍ਰਾਪਤੀ ਬਣ ਗਿਆ ਬ੍ਰਹਮ ਰਸਤੇ ਲੱਗ ਗਿਆ अच्छा जी ਜਿਹੜੀਆਂ ਕਹਾਣੀਆਂ ਉਹ ਮਸ਼ਹੂਰ ਵਿੱਚ ਇਹ ਕਹਿੰਦੇ ਆਂ ਵੀ ਪਾਰਸ ਕਿਸੇ ਧਾਤ ਨੂੰ ਕੰਚਨ ਬਣਾ ਦਿੰਦਾ ਇੱਥੇ ਕੀ ਗੱਲ ਹੈ ਇੱਥੇ ਤਾਂ ਹੈ ਹਾਂਜੀ ਇੱਥੇ ਤਾਂ ਫਿਰ ਉਹ ਨਹੀਂ ਕਹਾਣੀ ਬਾਕੀ ਚੱਲਦੀ ਹੈ ਇੱਥੇ ਨਹੀਂ ਲੱਗਦਾ ਕਿ ਉਹ ਪਾਰਸ ਧਾਤ ਨੂੰ ਸੋਨਾ ਬਣਾਉਂਦਾ ਪਾਰਸ ਤਾਂ ਪਾਰਸੇ ਮਿਲਦਾ ਆਹ ਤਾਂ ਪਾਲਸੇ ਬਣਾਉਂਦਾ ਗੁਰੂ ਬਣਾਉਂਦਾ ਸੇ ਠੀਕ ਹੈ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਸੇਵਕ ਵੀ ਆਪ ਹੈ ਦਾ ਅੱਛਾ ਜੀ ਕੱਲ ਨਾਲੀ ਚੱਲਦੀ ਹੈ ਹਾਂਜੀ ਆਪੇ ਤਾਂ ਹੱਤ ਹੈ ਆਪੇ ਪਾਰਸ ਸੇ ਤਾਂ ਇਹੀ ਧਾਲ ਹੈ ਆਪੇ ਠਾਕੁਰ ਆਪੇ ਸੇਵਕ ਦਾ ਧਾਲ ਹੈ ਦਾਲ ਦੀ ਉਹ ਗੱਲ ਚੱਲਦੀ ਆ। ਹਾਂਜੀ ਆਪੇ ਹੀ ਪਾਪਖੰਡ। ਪਾਪ ਕੀ ਦੇਸੀ ਪਾਪ ਜਿਹਦੇ ਦੇ ਵਿੱਚ ਉਹ ਤੇ। ਮੁਖੰਡ ਨਾਲ ਕਰਤੇ। ਠੀਕ। ਜਿਵੇਂ ਇਹ ਗੱਲ ਤੋਂ ਛੱਡਦੇ ਉਹਦੇ ਉੱਤੇ। ਇਹ ਕਰਨ ਨਾਲ ਹੋ ਗਏ ਬੰਦੇ ਸਮਝ ਆਈ ਛੱਡਣ ਹੋ ਗਏ ਦੁਇ ਪਾਰ ਤੋਂ। ਹੋ ਗਏ। ਠੀਕ ਹੈ ਜੀ ਆਪੇ ਸਭ ਘੱਟ ਭੋਗ ਵਾ ਸੁਆਮੀ ਆਪੇ ਹੀ ਸਭ ਅੰਜਨ। ਆਪਰੇ ਸਭ ਘਟ ਕੋ ਹੋਏ ਸਭ ਸਾਰੇ ਕਲ ਜੋ ਹਿਲਦੇ ਸਾਰੇ ਆਪਰੇ ਕੋ ਗਵੇ ਠੀਕ ਹੈ ਆਪੇ ਹੀ ਸਭ ਅੰਜਨ ਸਾਰੇ ਅਜਲੂ ਵਾਲਾ ਅੱਛਾ ਜੀ ਨਾਲ ਕੀ ਹੁੰਦਾ ਜਿਹੜਾ ਅੱਖੀ ਥੁੱਤ ਉਤਾਰਦਾ ਕਲਵੀ ਸੂਤ ਕੋ ਉਤਾਰਦਾ ਜੇਬਾ ਸੂਤ ਕੂੜ ਉਹ ਉਤਾਰਦਾ ਅਜਲੋ ਹੈ ਹਾਂ ਉਹ ਸੂਤ ਗਿਆਨ ਵਿੱਚ ਨਾ ਨਾ ਹਾਂਜੀ ਇਹ ਗਿਆਨ ਜਨਮ ਲੈਂਦੇ ਜਿਹੜਾ ਸੂਤ ਹੈ ਨਾਲਕ ਸੂਤ ਕੇਵਲ ਉੱਤਰ ਗਿਆਨ ਉਤਾਰੇ ਤੋਂ ਹੈ ਸਾਰੇ ਜੀਵ ਦਾ ਸੂਤ ਤਰਨਾ ਦਾ ਸੂਤ ਸਾਰੇ ਸੰਸਾਰ ਲਉਦਾ ਹੈ ਫਿਰ ਬਬੇਕ ਪ੍ਰਗਟ ਹੁੰਦੀ ਹੈ ਠੀਕ ਹੈ ਇੱਥੇ ਵੀ ਦਾਰਦੀ ਗੱਲ ਹੋ ਰਹੀ ਆਪੇ ਸਭ ਘਟ ਭੋਗਵੇ ਸਵਾਮੀ ਆਪੇ ਹੀ ਸਵੰਨਨ ਹੈ ਜੀ ਆਪੇ ਜਮਨ ਤੇ ਜਦ ਵੀ ਆਪੇ ਪਾਉਣ ਨੂੰ ਪ੍ਰਾਪਤ ਕਰਕੇ ਗੁਰਮੁਖੀ ਦਾ ਨਾਮ ਹੈ ਨਾ ਜਿਸ ਗੁਰ ਗਿਆਨ ਵਿੱਚ ਵਰਦਾ ਹੈ। ਸਮਝ ਆਪੇ ਹੀ ਆਪਣੀ ਸਮਝ ਆਪ ਖਲਾਫ ਹੱਕ ਦੀ ਬਸਤਲੀ ਆਪਣੀ ਸਮਝ ਤੋਂ ਗੁਰਬਾਣੀ ਜੋ ਤੋਂ ਆਪਣੇ ਲਾਹਾ ਲੈਣ। ਹਾਂਜੀ ਆਪ ਵਿਵੇਕ ਆਪ ਸਭ ਬੀਤਾ ਆਪੇ ਗੁਰਮੁਖ ਪੰਜਨ। ਫਿਰ ਇੱਕ ਕੈਸਾ ਕੋਈ ਨਹੀਂ ਜਦ ਕੋ ਜਾਂਦਾ ਬਵੇਕ ਫਿਰ ਕੋਈ ਕਿਸੇ ਨਾਲ ਫਰਕ ਨਹੀਂ ਫਿਰ ਬਵੇਕ ਤਬ ਉਹਦੀ ਬੁੱਢੀ ਜਲੀ ਬਵੇਕ ਬੁੱਢੀ ਐ ਫਿਰ ਦੇਖਿਆ ਵਾਸਤੇ ਹੋ ਗਿਆ ਅਧਰ ਹੋ ਗਿਆ ਫਿਰ ਹੋ ਗਿਆ ਆਪ ਸਭ ਬੇਤਾ ਬੇਤਾ ਵੀ ਆਪ ਜਨਮ ਵਾਲਾ ਵੀ ਆਪ ਹੈ ਅੱਛਾ ਜੀ ਆਪ ਹੈ ਵੀ ਆਪ ਆਪ ਵੇਦਨੀ ਜਲ ਲਗਾ ਦੀ ਦੇ ਵਾਲਾ ਵੀ ਆਪ ਹੈ ਕਿ ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖੀ ਭੰਜਨ ਆਪਾ ਗੁਰਮੁਖੀ ਹੈ ਕਮਨ ਦੇ ਉੱਤੇ ਚੋਟ ਕਰਦਾ ਹੈ ਹੰਕਾਰ ਤੇ ਪ੍ਰਹਾਰ ਕਰਦਾ ਅੱਛਾ ਜੀ ਦੁੱਖਾਂ ਤੇ ਪ੍ਰਹਾਰ ਕਰਦਾ ਦੁੱਖ ਭਜੇ ਦੇ ਬੰਧਨ ਕੱਟਦਾ ਗਿਆਨਤਾ ਦੇ ਹਾਂਜੀ ਬਦਲ ਵਾਰ ਜਿਹੜੇ ਦੇ ਪਰਬ ਕਰਕੇ ਦੁੱਖ ਸਾਨੂੰ ਮਹਿਸੂਸ ਹੁੰਦੇ ਦੁੱਖ ਔਰ ਵਾਲੀ ਦਾ ਦੁੱਖ ਨੂੰ ਘਾਰੂ ਕਹਿੰਦੀ ਹੈ ਅਸੀਂ ਤੋਂ ਗੁਰੂ ਜੀ ਕੋਲ ਬਹੁਤ ਹੋਰ ਕੁਝ ਬੱਧੀ ਬੈਠੇ ਕਹਿੰਦੇ ਇੱਕ ਗਿਆ ਦੁੱਖ ਦਾ ਸੀ ਧਿਆਨ ਕਰੋ ਉਹ ਕੁਟਕੇ ਵਧੀਆ ਰੂਪ ਐਸਾ ਬਣਾਤਾ ਦੁੱਖ ਦਾ ਦੁੱਖ ਹੋਈ ਹੈ ਜਿਸ ਤੁਸੀਂ ਐਕਸੈਪਟ ਕਰਕੇ ਰਾਜੀ ਉਹ ਜਿਹੜਾ ਦੁੱਖ ਦਾ ਰੂਪ ਦਿਖਾਇਆ ਸੀ ਤੁਹਾਨੂੰ ਉਹ ਭਜੇ ਤੋੜਿਆ ਤੁਹ ਕੁਸ ਤੋੜਿਆ ਹਮਮ ਬਖਸ਼ਾ ਤੋੜਿਆ ਵੀ ਦੁੱਖ ਮਾੜਾ ਹੁੰਦਾ ਬਖਸ਼ਾ ਬਣਾਇਆ ਵੀ ਦੁੱਖ ਚ ਬਹ ਹੁੰਦਾ ਸੁਖ ਦਾ ਦੇਖੀ ਕੋਣ ਬਦਲੇ ਆ ਜਨ ਨਾਨਕ ਸਲਾਹੇ ਨਾ ਰੱਜੈ ਤੁਧ ਤੂੰ ਹਰ ਸੁਖ ਦਾਤਾ ਕਹਿੰਦਾ ਐਸੀ ਵਿਵਸਥਾ ਬਣਦੀ ਹੈ ਤੇ ਇਹ ਸਲਾਹ ਆਖਵਾ ਦਾ ਜੈਦੀ ਹੈ ਠੀਕ ਹੈ ਜੀ ਤੂੰ ਕਿਉਂ ਦੇਖ ਰਿਹਾ ਹੈ ਤੂੰ ਦਾਤਾ ਦਾਤਾ ਮਾਰ ਰਿਹਾ ਹੈ ਲੋਕਾਂ ਨੂੰ ਵੱਢੀ ਜਾ ਰਹੇ ਲੋਕਾਂ ਨੂੰ ਕੋਈ ਬਗਲਾ ਨਹੀਂ ਥਾਮੀ ਰਹੀ ਵੀ ਕਈ ਜਾ ਰਹੇ ਕੋਈ ਨਹੀਂ ਬਗਲਾ ਉਹਨੂੰ ਵੀ ਪਰ ਦੇ ਜਾ ਰਹੇ ਆਪਣੀ ਵਰਗੀ ਤੂੰ ਕੋਈ ਬੱਗਏ ਹੋਰ ਕੁਝ ਹੋਰ ਦੇ ਜਾ ਰਹੇ ਇਹ ਲੋਕਾਂ ਨੂੰ ਬੁਰਾ ਨਹੀਂ ਆਉਂਦਾ ਨਹੀਂ ਮੰਨਦੇ ਵਾਹ ਨੂੰ ਕੋਈ ਕਹਿਵਾਲ ਸਮਝ ਆ ਰਹੀ ਠੀਕ ਹੈ ਤੁਦ ਕਰਤੇ ਤੂੰ ਹਰ ਸੁਖ ਦਾਤਾ ਵੰਡਣ ਵੀ ਹਰ ਨੂੰ ਤੂੰ ਸੁਖ ਦਿਨਾ ਹਰ ਅੱਛਾ ਜੀ ਹਰ ਕੇ ਜਨ ਮੈਂ ਹਰ ਦਾ ਭਾਵ ਹਰ ਕਿਸੇ ਨੂੰ ਲਵਾਂਗੇ ਤੇ ਹਰਦਾ ਬਾਹ ਕੇ ਜੜੂ ਨਬਦ ਸਾਰੇ ਨੂੰ ਦਦਾ ਤੇਪੋ ਜੋਤਰੀ ਗੱਲ ਵੀ ਕਰੀਏ ਤੇ ਜੋਤ ਨੂੰ ਸੁੱਖ ਜੋ ਹੈਗਾ ਉਹ ਕਰਤੇ ਤੋਂ ਹੀ ਮਿਲਦਾ ਸੁੱਖ ਆ ਗਿਆ ਜੋਤ ਨੂੰ ਦਾ ਹਰ ਕਿਸੇ ਠੀਕ ਕੋਈ ਵੀ ਜੋਤੇ ਆ ਬਾਪੀ ਦਾ ਸਭ ਮਿੱਟੀ ਹੈ ਹਾਂ ਜੋਤ ਕਰੂ ਪਕਰ ਜੋਤ ਫੜੂ ਜੋਤ ਦਾਤ ਬਤੂ ਜੋਤ ਠੀਕ ਹੈ ਜੀ ਤੇ 10ਵੀਂ ਪੌੜੀ ਸਮਾਪਤੀ ਹੈ ਜੀ